ਸ਼ਲੋਕ ਮਹੱਲਾ ਪਹਿਲਾ ਸੰਸਰਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੋਵੇ ਘਰ ਆਇਆ ਅਜੈਸ ਪੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਈ ਹਜ਼ਾਰਾਂ ਦੀ দান ਨੂੰ ਦੇ ਦਿੱਤੇ ਦਾ ਰੁੰਦਾ ਮੇਰੇ ਕੋ ਹੈ ਨਹੀਂ ਮੇਰੇ ਕੋ ਰਾਜਿਆਂ ਦਾ ਦੇਵਤਾ ਹੈ ਮਨ ਮਾਇਆ 'ਚ ਫਸਿਆ ਹੋਇਆ ਮੈਂ ਤਾਂ ਨੇ ਨੂੰ ਦਿੱਤੇ ਨੇ ਵਰਤਨ ਤੋਂ ਦੇ ਦਿੱਤੇ ਨੇ ਫਿਰ ਵੀ ਰੋਂਦੇ ਦਾ ਰੋਂਦਾ। ਧਾਨ ਦੇ ਅੰਦਰ ਰੁਆਇਆ। ਪਰਤਿ ਰਾਮ ਜਦ ਰਾਮ ਨੂੰ ਪਰਸਲੰਦੈ। ਰੋਵੇ ਘਰ ਆਇਆ ਫਿਰ ਫਿਰ ਵੀ ਰੋਂਦਾ। ਉਹ ਕਹਿੰਦਾ ਉੱਥੇ ਨਾ ਮੈਂ ਸੁਖੀ ਸੀ ਇੱਥੇ ਸੁਖੀ ਹਾਂ ਪਰ ਮੈਂ ਇਹਨੇ ਕਿੰਝ ਰੋ ਦੰਦੇ ਕਾਰਨ ਦੁਖੀ ਰਹਾ। ਰਾਮਬਾਲ ਪਿੱਟਕਾ ਲੱਤ ਰਕੀ ਦੁਖੀ ਰਹਾ। ਰਾਮਬਾਲ ਜਦ ਮੋਹ ਹੋਇਆ ਤਾਂ ਸੁਖੀ ਹੋ ਗਿਆ। ਇਹ ਆਪਣੀ ਬੇਵਕੂਫੀ ਤੇ ਰੋਂਦਾ ਹੈ ਕਿ ਸਿਰਫ ਮੈਂ ਪਿੱਛੇ ਕਮਉਣੀ ਸੀ ਇਹ ਨਹੀਂ ਇਹਨੇ ਦੋ ਕੰਤਾਂ ਗੱਲੇ। ਕਿ ਟਿਕਮਾਲੀ ਉਹਨੂੰ ਸੁਕੇ ਜਾਵਨੀ। ਪਰਸਨਾ ਰਾਮ ਹੁਣ ਆਪਣੀ ਬੇਵਕੂਫੀ ਪਰ ਰੋਂਦਾ ਜੀ। ਹਾਂ ਬੇਵਕੂਫ ਤੇ ਰੋਂਦਾ। ਮਰੀ ਗਿਆਨ ਤਾਂ ਚੱਲ ਨਹੀਂ ਤੇ ਮੈਂ ਗੜਾ। ਮੇਰੇ ਬਰਦਾ ਕੋਈ ਹੈ ਹੀ ਨਹੀਂ। ਉਹ ਬੇਵਕੂਫ ਤੇ ਰੋਂਦਾ। ਹਾਂ ਜੀ। ਅਜੇ ਸਿਰੋਵੇ ਪੀਖਿਆ ਖਾਏ। ਐਸੀ ਦਰਗਾ ਮਿਲੇ ਸਜਾਈ ਇੱਕ ਹਾਜ ਰਾਜਾ ਸੀ ਹੋਇਆ ਐਵੇਂ ਨੇ ਪੰਨੂੰਦਾ ਕੋ ਬਜ਼ੁਰਗ ਸੀ ਉਹ ਆਵਨ ਨੂੰ ਤੋਂ ਬਾਅਦ ਪੈਦਾ ਹੋਇਆ ਸੀ ਉਹ ਦਾਨ ਸਵੇਰ ਖਾਦੇ ਪੀਤੇ ਤੇ ਬਿਨੋ ਉਹ ਤੇ ਜਾ ਕੇ ਲਾਟ ਕੇ ਉਹ ਘਾਂ ਛੋੜਿਆ ਨੇ ਗੁੱਸਾ ਆ ਗਿਆ ਵੀ ਸਾਦੂ ਦੇ ਦੇਖੂ ਹੈ ਮੈਂ ਅਸਵਰ ਦਿਖਾਣਾ ਮੇਰੇ ਬੱਚੇ ਆ ਗਿਆ ਉਸ ਆਦਮੀ ਦੇ ਘਰ ਤੋਂ ਜਾਂਦਾ ਸੀ ਜੋ ਮੇਰੇ ਨਾਲ ਵੀ ਖਾਂਦਾ ਸੀ ਇਹ ਨਹੀਂ ਖਾਂਦਾ ਸੀ। ਰੰਗੀਰ ਸੀ ਸੀ ਉਹ ਚਰੰਗੀਰ ਦੀ। ਰੰਗੀਰ ਸੀ ਕੋਲ ਹੈ। ਤਾਂ ਮਤਲਬ ਇਹ ਨਹੀਂ ਮਤਲਬ ਕੁਝ ਵੀ ਹੋਵੇ। ਉਹਨੇ ਉਹਦਾ ਨਿਰਦ੍ਰਿ ਕੋਟਿਆਂ ਦੀ ਉਂਗਲਾ ਫਰਕ ਉਹਦੇ ਬੱਲੇ ਦੀ ਬਾਤ। ਉਹ ਤਰਕਸ ਕਹਿ ਕੇ ਲੈ ਗਿਆ ਤੇਰੀ ਦੁੱਖ ਜਨਮ ਰਾਜਾ ਹੋਵੇ? ਜਾਗਰਤ ਉਹਨੇ ਕੋੜ ਦੇ ਦਸਰਤੀ ਮੈਂ ਤਾਂ ਕਹਿੰਦੇ ਬੰਨਣ ਲੱਗੀ ਇਹਦੋਂ ਹੋ ਗਿਆ ਬੱਦਾ ਇੱਕ ਦਿਨ ਰਾਜਾ ਉੱਥੇ ਕੋੜ ਤੇ ਸਵਾਰ ਖੇਡਦਾ ਖੇਲਦਾ ਕੋੜ ਖੇਡਦਾ ਖੇਲਦਾ ਤਾਂ ਨਹੀਂ ਅੱਤੇ ਰੇਂਦੇ ਰਾਤ ਨੂੰ ਬਾਦੂ ਕਹਿੰਦਾ ਲੈਣਾ ਤੂੰ ਆਪਣਾ ਜਲ ਪਾਣੀ ਚਾਹ ਕਰੇ ਜਾਂਦਾ ਬਣ ਅੱਧ ਪਰੇ ਉਹਨੇ ਦੋ ਤਿੰਨ ਚਾਰ ਵਾਰ ਥਾਲਿਆ ਦੋ ਤਿੰਨ ਚਾਰ ਵਾਰ ਇਹੋਨੇ ਪੁੱਛਿਆ ਤੇ ਉਹਨੇ ਕਹਾਣੀ ਦੱਸਦੀ ਕਿ ਇੱਕ ਰਾਜਾ ਹੈ ਉਹਦਾ ਇੱਦਤਾ ਹੈ ਮੈਨੂੰ ਦਾਨ ਹੈ ਉਹਦਾ ਦਾਨ ਵਧ ਰਿਹਾ ਪੈਣਾ ਤੇ ਉਹ ਬਰਲਾਪ ਕਰਨ ਲੱਗਿਆ ਵੀ ਤਾਂ ਮੇਰੇ ਗਲਤੀ ਹੋਈ ਸੀ ਮੈਂ ਦਿੱਤੀ ਸੀ ਲੋਤ ਨਾ ਮੈਨੂੰ ਤਾਂ ਪਤਾ ਨਹੀਂ ਚੰਦ ਦਿੱਤੀ ਹੋ ਰੇਦਾ ਉਪਾਏ ਕਰੋ ਉਹਦਾ ਪਾਏ ਹਾਥੀ ਦੇ ਉੱਤੇ ਬਹਿ ਗਿਆ ਉਹ ਪਾਣੀ ਵਾਲੀ ਬਹੁਤ ਦਾਲੂ ਦੀ ਲੈ ਕੇ ਪਿੰਡ ਜੀ ਗੇੜਾ ਦਿੰਦਾ ਹੈ ਬਦਲੋ ਵੀ ਕਰਾਈ ਬਦਨਾਮੀ ਨਾ ਸਹੀ ਲੱਗ। ਉਹ ਮੂੜ ਉਹ ਮੂੜ ਰੈਡੀਓਲੀ ਜੱਤੀ ਸੀ ਹੋ ਵੀ ਕਿਵੇਂ ਖਾਵਾਂ। ਉਹਨੂੰ ਕਹਿ ਜਾਲ ਕੇ ਉਹਦੀ ਸਵਾ ਬਣਾਤੀ। ਉਹ ਬਣਾਤੀ ਪਨੀਰੀ ਬਣਾਤੀ ਪਨੀ ਬਣਾਤੀ। ਉਹ ਤਿੰਨ ਖਾਂਦਾ ਸੀ ਤਾਂ ਰੋਂਦਾ ਹੁੰਦਾ ਸੀ। ਕ੍ਰੋਧ ਵਿੱਚ ਆ ਕੇ ਦਾਣ ਕੀਤਾ ਹੋਇਆ ਉਹਨੇ ਖਾਣਾ ਪੈਂਦਾ। ਇਹ ਨਹੀਂ ਦਾ ਦੂਆ ਜਾਨਵਰ ਆ ਕੇ ਖਾਣਾ ਪੈਣਾ ਸੀ ਬੱਦੂ ਤੇ ਉਹ ਜਾਨਵਰ ਤਾਂ ਗਿਆ ਤੱਕਿਆ ਐਸੇ ਜਾਨਵਰ ਨੂੰ ਕੀ ਖਾਣ ਹਾਂਜੀ ਵਾਲੀ ਆਪਾਂ ਗੁਰਮਤ ਦਾ ਕੀ ਅਰਥ ਲੈਨੇ ਸੋ ਰੋਵੈ ਅਜੇ ਵੀ ਰੋ ਰਿਹਾ ਖਾਏ ਉਹ ਜਿਹੜਾ ਕੋ ਮਿਲਦਾ ਉਹਨਾਂ ਕਲੇ ਕਰ ਗਿਆ ਇਕ ਹੁਣ ਰੋ ਵੀ ਰਿਹਾ ਤੇ ਕੀ ਵੀ ਜਾਂਦੀ ਐ ਖਾਈ ਵੀ ਜਾਂਦਾ ਰੋਈ ਵੀ ਜਾਂਦਾ ਬੇਸਬਰ ਐ ਸਬਰ ਹੈ ਨਹੀਂ ਸਤੋਖ ਹੈ ਜੀ ਠੀਕ ਹੈ ਜੀ ਐਸੀ ਦਰਗਾ ਮਲੇ ਸਜਾਈ ਐਜਨੋ ਤੋਂ ਦਰਗਾ ਸਜਾਈ ਮੰਨੀ ਸਜਾਈ ਹੈ ਰੋਈ ਜਾਂਦਾ ਤੇ ਕਹਿ ਰਹਾ ਸਰ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਰਾਮ ਰਾਮ ਮੇਨ ਸੀ ਜਦੋਂ ਨੂੰ ਅੱਜ ਰੰਗੋ ਕਰ ਦਿੱਤਾ ਉਹਦੇ ਮਨ ਬਾਗੀ ਹੋ ਗਿਆ ਜੀ ਥੋਰ ਬਦਲ ਗਈ ਕੋਈ ਜਾਣੇ ਜੋ ਕਹਾਂ ਵੀ ਜਾਉ ਪਾ ਇਹੋ ਥੱਲੇ ਕਰਿਓ ਹੁਣ ਨਾ ਗੈਣਾ ਨਹੀਂ ਤਾਂ ਰੋਇਆ ਬਈ ਮਨ ਮੇਰੇ ਨਾਲ ਜਿਤ ਪਿਆ ਹਲਤ ਸਾਨੂੰ ਉਹ ਗਿਆ ਉਹ ਇੱਥੇ ਆ ਗਈ ਸੀਤਾ ਲਖਮਣ ਵੀ ਵਿਚੜ ਗਏ ਉਹ ਆਪਣੀ ਮਰਜ਼ੀ ਕਰਦੇ ਨੇ RAM ਨੂੰ ਪੂਰੀ ਦਈ ਦੀ ਨਾ ਲਿਖਿਆ ਜੀ ਲਖਮਣ ਨੂੰ ਨਾ ਮਨ ਦੇਖਣ ਵਾਲਾ ਲਖਣਾ ਦੇਖਣਾ ਹੁੰਦਾ ਜਿਹਨੂੰ ਦਰਸ਼ਨ ਹੋਣ ਨੇ ਉਹ ਮਨ ਹੈ ਅੱਛਾ ਇਹ ਲਖ ਸੀਤਾ ਪਰ ਇਹ ਮਾਨ ਹੈ ਵੈਸੇ ਹਾਂ ਜੀ ਸੀਤਾ ਲਖਮਣ ਵਿਛੜ ਗਿਆ ਅੱਛਾ ਲਖਮਣ ਇੱਕੋ ਹੀ ਆ ਪਰ ਇਹ ਲਖਮਣ ਤਾਂ ਨਹੀਂ ਨਾ ਹੈ ਜਿਹਨੂੰ ਰਾਮ ਦਾ ਭਰਾ ਕਹਿੰਦੇ ਉਹ ਹੈ ਉਹ ਹੀ ਦਾ ਲਖਮਣ ਹੈ ਸਾਡਾ ਲਖਮਣ ਅੱਛਾ ਰਾਮ ਨੂੰ ਇਹਦਾ ਹੀ ਦਰਸ਼ਨ ਹੋਣਾ ਹਾਂ ਜੀ ਰੋਣ ਨੂੰ ਰਾਵਣ ਨੂੰ ਜੇ ਰੋਣ ਨੂੰ ਇਹਨਾਂ ਦਰਸ਼ਨ ਦੋਵਾਂ ਨੇ ਕਦੂ ਇਹ ਜੇ ਸਮਾਉਣ ਅੱਛਾ ਗਵਾਏ ਜਿਨੀ ਸੀਤਾ ਆਂਦੀ ਡੌਰੂ ਵਾਏ ਉਹ ਲੰਕਾ ਗਵਾ ਲਈ ਸਾਰੀ ਬਾਦ ਦੇ ਵਿੱਚ ਉਹ ਯਾਰ ਜੇਹੀ ਜਾਂਦਾ ਲੰਕਾ ਕਿਉਂ ਜਾਂਦੀ ਤੇਰੀ ਉਹ ਵੀ ਰੋਂਦਾ ਗਲਤੀ ਕਰਕੇ ਰੋਂਦਾ ਆਦਮੀ ਦਹਿਸਰ ਕਿਹਨੂੰ ਕਿਹਾ ਰਾਵਣ ਨੂੰ ਅੱਛਾ ਹੁਣ ਰਾਵਣ ਮਨ ਹੀ ਆ ਗਿਆ ਉਹਨਾਂ ਦਾ ਰਾਵਣ ਦਾਸ ਰਾਵਲਾ ਰਾਵਣ ਇਹਨਾਂ ਦੀ ਕਹਾਣੀ ਸੋਧ ਸੋਧ ਰਹੇ ਨੇ ਜਿਹੜੀ ਨਾਵਨ ਅੱਛਾ ਕੱਟ ਲਿਆ ਰੋਬੇ ਦਾਸ ਲੰਕਾ ਗਵਾਏ ਜਿੰਨ ਸੀਤਾ ਆਂਦੀ ਡੌਰੂ ਵਾਏ ਹਾਂ ਜੀ ਸੀਤਾ ਦਾ ਡੌਰੂ ਬਚਾ ਕੇ ਲੈ ਆਂਦੀ ਲਾ ਲਈ ਆਪਣੇ ਡੌਰੂ ਤੋਂ ਕੀ ਭਾਵੇਂ ਜੀ ਕੱਲ ਨਾਰ ਬੁੱਧੀ ਮਗਲ ਦੀ ਲਾਈ ਹੋਈ अच्छा ਜੀ ये कैंदा पावा भी दहसिर मन हैगा इनु हृदय चो निवास गवा लिया ते सीता नु अपने नाल नि फिरदा है इस तरह दी गल दौडू बजाके दौडू बजाके ओ खावा दे ओ करंगे ओ करंगे दुनिया देख के कोखियां बणावांगे ठीक है है दहसिर मन नु ए केया है जी चाहे रावण है दहसिर मन है हुंदा अच्छा जी हां जी रोवे पांडव ਤਾਂ ਮਜੂਰ ਮਜ਼ਦੂਰ ਜਿਨਕੇ ਸਵਾਮੀ ਰਹਿਤ ਦੂਰ ਉਹ ਪੰਡਵ ਜਿਹੜੇ ਸੀ ਉਹ ਵੀ ਤਾਂ ਰੋਏ ਨੇ ਰਾਜੇ ਦੇ ਵਿਰਾਟ ਦੇ ਜਾ ਕੇ ਸੋਈ ਕੇ ਰੋਟੀ ਕਮਾਉਣੀ ਕੋਈ ਨੌਕਰੀ ਕਰਨੀ ਪਈ ਸਵਾਮੀ ਜਿਹਨਕੇ ਰਾਇ ਤਾਂ ਦੂਰ ਰਹੇ ਨਾਲ ਫਿਰ ਵੀ ਕੋਈ ਕਰਨੀ ਪਈ ਪੰਡਵ ਜਦੋਂ ਨਾਲ ਜੁੜਿਆ ਹੈ ਮਾਇਆ ਦੇ ਸਾਰੇ ਹੀ ਹੋ ਆ ਕਿ ਅਸੀਂ ਬੰਨਵਾ ਤੋਂ ਹੀ ਹੈਗੇ ਨਹੀਂ ਤੇ ਨੇ ਸਾਡੇ ਜਿੰਨੇ ਸਰੀਰ ਨਾਲ ਜੁੜਿਆ ਨੇ ਮਜ਼ਦੂਰ ਨੇ ਸਾਮੀ ਸਾਰਿਆਂ ਦੇ ਹਜੂਰ ਹੈ ਨਾਲੇ ਹੈ ਕਿ ਕੇ ਕਹਿੰਦਾ ਭਾਬੀ ਚਿੱਤ ਨਾਲ ਹੈ ਫੇਰ ਵੀ ਮਨ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਇਹ ਮਜ਼ਦੂਰ ਤੋਂ ਕੀ ਭਾਵ ਹੁੰਦਾ ਜੀ ਉਹ ਕਰਦਾ ਸਰੀਰ ਦੀ ਜਾ ਕਰੀ ਨਹੀਂ ਕਰਦਾ ਮਾਇਆ ਦੀ ਮਜ਼ਦੂਰੀ ਕਰਦਾ ਹੈ ਉਹ ਕੀਰਤਨ ਵੀ ਕਰਦਾ ਤਾਂ ਪੈਸੇ ਲੈਂਦਾ ਮਜ਼ਦੂਰੀ ਕਰਦਾ ਹੈ ਜੀ ਵੀ ਕਰਦਾ ਮਜ਼ਦੂਰੀ ਕਰਦਾ ਹੈ ਬੋਲ ਕਰਦਾ ਹਾਂਜੀ ਰੂਪ ਹੈ ਖੋਏ ਗਿਆ ਪਾਪੀ ਪਿਆ ਜ ਜਨਮ ਦਾ ਜਦ ਅਸਲ ਚ ਰੂਪ ਹੈ ਜਦ ਖੋ ਜਾਂਦਾ ਹੈ ਇਹ ਤਾਂ ਨਿਬ ਛੁਟ ਹੈ ਲਿਵ ਛੁੱਟ ਜਾਂਦੀ ਹੈ ਤ੍ਰਿਸ਼ਨਾ ਲੱਗ ਜਾਂਦੀ ਹੈ ਮੁੜ ਕੇ ਨੂੰ ਦੇਵੇ ਰਹਾ ਤਾਂ ਨਹੀਂ ਹੋਈ ਨਹੀਂ ਲਿਵ ਖੋ ਕਾਰਨ ਪਾਪੀ ਹੋ ਗਿਆ ਲਿਵ ਨਾ ਛੁੱਟਦੀ ਪਾਪੀ ਨਾ ਬਣਦਾ ਇੱਕੋ ਕਾਰਨ ਸਭ ਦੇ ਪਾਪੀ ਬਣਦਾ ਲਿਵ ਛੁੱਟ ਗਈ ਲੱਗੀ ਸੀ ਹਾਂ ਜੀ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵੈ ਸੇਖੋਂ ਸਾਰੇ ਕਬੀਰ ਉਹ ਵੀ ਰੋਂਦੇ ਵਿਚਾਰੇ ਅੰਤ ਕਾਲ ਮਤ ਲਾਗੇ ਭੀੜ ਅੰਤ ਕਾਲ ਜੇ ਸਰੀਰ ਛੱਡਣ ਮਾਇਆ ਛੱਡਣੀ ਹੈ ਸਾਨੂੰ ਦਿੱਕਤ ਨਾ ਆਵੇ ਤਕਲੀਫ ਨਾ ਹੋਵੇ ਭੀੜ ਨਾ ਲੱਗੇ ਜਦਰਾ ਈਲ ਫਰੇਰ ਫਰੇ ਤਾਂ ਪਿਲ ਤੇ ਵਿਚਾਲੇ ਇਹ ਇਸਲਾਮ ਵੱਲੋਂ ਆਈ ਹੈ ਜੀ ਰੋਵੈ ਸੇਖ ਮਸਾ ਪੀਰ ਜੀ ठीक है, अंतकाल मत ਮਤ गए ਭੀੜ की, ਜਿਹੜਾ ਮਰਨਾ ਸੁਹੇਲਾ ਰਹੇ ਉਦੋਂ ਹੀ ਲੈ ਬੇਟੜ ਕੇ ਤੱਤ ਤੇ ਇਹਨੂੰ ਕਾਨੂੰ भी ਹੱਡੀਆਂ ਨੂੰ ਝੜਕਾਉਣ ਹਾਂਜੀ ਰੋਵੇ ਰਾਜੇ ਕੰਨ ਪੜਾਏ ਕਰ ਕਰ ਮੰਗੈ कुछ ਜਾਏ ਕੰਨ ਪੜਾ ਇਹ ਜੋਗੀਆਂ ਬਾਰੇ ਕਿਹਾ ਜੀ ਰਾਜਾ ਜੇਲੇ ਬਣਾ ਲੈ ਤੇ ਭਤਰੀ ਵਰਗੇ ਆਹ ਤਾਂ ਦੇਖਿਆ ਨੂੰ ਹਾਂ ਜੀ ਰੋਵੈ ਕਿਰਪਨ ਕੰਮ ਕਰਿਆ ਗਿਆਨ ਗਵਾਕਰ ਹੁੰਦੇ ਨੇ ਮ ਗਿਆਨ ਛੱਡਦਾ ਨੀ ਪ੍ਰਮ ਗਿਆਨ ਛੱਡਦਾ ਨੀ ਗਿਆਨ ਲੈ ਲਿਆ ਬਾੜ ਪਾੜ ਪਾੜ ਲਈ ਫਿਰਦੇ ਨੇ ਉਹਨਾਂ ਕੋਈ ਨਹੀਂ ਉਹਨਾਂ ਲੋਕ ਸੁਭਾਨ ਕਰਦੇ ਲਈ ਜਵਾਬ ਕੋਈ ਨਹੀਂ ਹਾਂਜੀ ਬਾਲੀ ਰੋਵੇ ਨਾਹੀਂ ਪਧਾਰ ਨਾਨਕ ਦੁਖੀਆ ਸਭ ਸੰਸਾਰ ਬਾਲੀ ਰੋਵੇ ਨਾਹੀਂ ਪਧਾਰ ਬਾਲੀ ਤਾਂ ਹੁੰਦੀ ਆ ਬਾਲਬੁੱਧ ਤਾਂ ਹੁੰਦੀ ਆ ਬਤਾ ਰਹੇ ਦੀ ਕਰ ਇਸ ਵੇਖ ਕੇ ਨਾਨਕ ਕਰੇਗਾ ਦੁਖੀ ਹਸਬ ਦੇ ਬਿਨਾਂ ਦੁੱਖ ਹੋਊਗਾ ਹੀ ਹੋਗਾ ਠੀਕ ਹੈ ਜੀ ਪਤਾਰ ਦੇ ਬਿਨਾਂ ਚਿੰਤਾ ਰਹੂਗੀ ਰਹੂਗੀ ਪਤਾਰ ਦੇ ਬਿਨਾਂ ਫਿਕਰ ਹੋਊਗਾ ਹੀ ਰਹੂਗਾ RAM ਨੂੰ ਹੀ ਪਤਾਰ ਕਿਹਾ ਹੈ ਹਾਂ ਜੀ ਠੀਕ ਹੈ ਜੀ ਇਹ ਬੁੱਧੀ ਵਾਸਤੇ ਆਇਆ ਹਾਂ ਜੀ ਹਾਂ ਜੀ ਮਨ ਜਿਨ ਜਾਏ ਔਰੀ ਕਰਮ ਨਾ ਲਿਖਿਆ ਲਾਏ RAM ਨੂੰ ਜੇ ਬੰਨੇ ਦੇ ਜੰਗਾਇਓ ਬਾਜੀ ਜਿੱਥੇ ਆਂਦਾ ਉਹਨੂੰ ਰੋਣਾ ਨਹੀਂ ਪੈਂਦਾ ਹੋਰੀ ਕਰਮ ਨਾ ਲਿਖਿਆ ਲਾਈ ਹੋਰ ਕੋਈ ਕੰਮ ਕੀਤਾ ਹੋਇਆ ਲਿਖੀ ਨਹੀਂ ਲੱਗਦਾ ਦੇ ਵੱਡੇ ਵੱਡੇ ਜਲੂਸ ਕੱਢੇ ਲਿਖੇ ਨਹੀਂ ਕੀਰਤਨ ਦਰਵਾਜ਼ੇ ਲਿਖੇ ਨਹੀਂ ਲਗਨੇ ਇੱਥੇ ਪੀੜ ਲੈਣ ਨੇ ਸਲਾਮੋ ਪੀੜ ਕੇ ਕੱਢ ਲੈਣ ਨੇ ਹੋਰ ਅਗਲੇ ਜਨਮ ਦੇ ਵਿੱਚ ਜੁਕੇ ਮੂੰਹ ਵਾਲੇ ਬਣਾ ਲੈਣਗੇ ਮਹੱਲਾ ਦੂਜਾ ਜਪ ਤਪ ਸਭ ਕਿਛ ਮੰਨੀ ਨਾਨਕ ਮੰਨਿਆ ਮੰਨੀ ਐ ਬੁੱਝੀਏ ਗੁਰ ਪ੍ਰਸਾਦ ਜਪ ਤਪ ਜਿਹੜਾ ਹੈਗਾ ਬੰਦੇ ਨੂੰ ਜਪਤਾ ਪਾ ਜੇ ਮੰਨਿਆ ਹੀ ਜਪ ਤਪ ਦਾਦਾ ਸਭ ਕਿਛ ਮੰਨੀ ਜੇ ਮੰਨੀ ਤਾਂ ਜਪ ਤਪ ਦਵਾਈ ਮੂਝ ਪਾਦੀ ਪਰ ਅਸਰ ਕੀਤਾ ਹੀ ਦਵਾਈ ਨੇ ਕਾਜੇ ਮੁਖ ਹੋਈ ਦਵਾਈ ਕਹਾ ਘਾ ਘਈ ਨਹੀਂ ਉਹਨੇ ਅਸਰ ਕੀ ਕਰਨਾ ਮਨ ਨੂੰ ਨਹੀਂ ਲੈ ਗਾ ਦੇ ਗੱਲ ਮੰਡੀ ਅਵਰ ਕਾਰਾਂ ਸਭ ਬਾਦ ਹੋ ਜਿਹੜੇ ਸਾਰੇ ਕੰਮ ਨੇ ਤਾਰਨ ਦੇ ਅਕਾਰ ਸੇਵਾ ਸਾਰੀ ਬਾਗ ਝਗੜੇ ਦੇ ਸਾਰੀਆਂ ਖੂਨ ਖਾਨੇ ਝਗੜੇ ਨੇ ਸਾਰੇ ਜਿੰਨੇ ਇਹਨਾਂ ਨੇ ਬਣਾਏ ਨੇ ਇਹ ਖੂਨ ਖਾਨੇ ਝਗੜੇ ਨੇ ਬਾਦ ਵਾਲ ਨਾਨਕ ਮੰਨਿਆ ਮੰਨੀ ਹੈ ਹੈ ਗੁਰ ਪ੍ਰਸਾਦ ਨਾਨਕ ਮੰਨਿਆ ਬਨੀਏ ਜਿਹੜਾ ਦੁਨੀਆ ਮੰਨ ਲਈ ਹੈ ਜਿਹੜਾ ਬੰਨ ਜੋਗ ਹੈ ਉਸੋ ਜੇ ਬਣੀਏ ਗੁਜੀਏ ਗੁਰਪ੍ਰਸਾਦ ਪਹਿਲਾਂ ਤਾਂ ਗਿਆਨ ਹੋ ਕੇ ਨਾਨਕ ਮੰਨਿਆ ਬਨੀਏ ਜਿਹੜਾ ਮੰਨਿਆ ਆਇਆ ਹੈ ਮੰਨਨ ਜੋਗ ਉਹਨੂੰ ਬਨੀਏ ਗੁਜੀਏ ਗੁਰਪ੍ਰਸਾਦ ਫਿਰ ਐਵੇਂ ਨਾ ਬਣ ਲਈ ਵੀ ਭੇਡ ਮੰਨਦੀ ਅਸੀਂ ਮੰਨ ਲਈਏ ਕੁਝ ਵੀ ਲਈਏ ਗਿਆਨ ਦੀ ਕਿਰਪਾ ਨਾਲ ਵੀ ਜੋਗ ਠੀਕ ਵੀ ਮੰਨਦਾ ਹੈ ਬੁਝੇ ਤੇ ਬਨਾਨੀ ਮਨੋ ਸਮਝੇ ਤੇ ਬਨਾਨੀ ਮਨੋ ਕੌੜੀ ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ ਸਭ ਮੈਂ ਗੁਰਮੁਖੀ ਪ੍ਰਗਟ ਕਾਇਆ ਦਾ ਹੰਸ ਦਾ ਮੇਲ ਤੁਰੋਂ ਕਰਕੇ ਨੇ ਲਿਖ ਕੇ ਪਾਇਆ ਜਿੰਨਾ ਜਣ ਮੇਲ ਦੇਣਾ ਉਹਨਾਂ ਮੇ ਆ ਕਾਇਆ ਬਾਲਸ ਰੱਬਾ ਹੋਇਆ ਜਾ ਅੰਦਰਲਾ ਹੋਇਆ ਰੱਬਾ ਵੀ ਤਾਂ ਖਾਇਆ ਨਹੀਂ ਹੰਸ ਕਿਉਂ ਆ ਰਿਹਾ ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ ਹੰਸ ਦਾ ਸਰੀਰ ਹੈ ਕਾਇਆ ਉਹਦੇ ਨਾਲ ਇਹ ਉੱਡਦਾ ਹੈ ਉਹਦੇ ਨਾਲ ਕੱਪੜਾ ਵੀ ਉੱਡਦਾ ਹੈ ਤਾਂ ਕੱਪੜਾ ਪਾਇਆ ਹੋਇਆ ਹੈ ਅੱਛਾ ਜੀ ਕਾਇਆ ਹੰਸ ਤੁਰ ਕਰਤਾ ਲਿਖ ਪਾਇਆ ਕਰਦੈ ਹੁਕਮ ਨਾ ਪਾਇਆ ਠੀਕ ਹੈ ਜੀ ਸਭ ਨੇ ਗੁਪਤ ਵਰਤ ਦਾ ਗੁਰਮੁਖੀ ਪ੍ਰਗਟਾਇਆ ਸਰਗੜੋਜੰ ਦੇ ਅੰਦਰ ਵਰਤਦਾ ਸਭਨਾ ਦੇ ਅੰਦਰ ਗੁਰਮੁਖੰਦ ਅੰਦਰ ਸਾਪਤੋ ਜਾਂਦਾ ਵਰਤਦਾ ਦੂਜਿਆਂ ਦੇ ਅੰਦਰ ਮਲੂਮ ਤਾਂ ਹੁੰਦਾ ਸਾਪਤ ਨਹੀਂ ਕਰ ਸਕਦੇ ਉਹ ਅੱਛਾ ਜੀ ਗੁਣ ਗਾਵੈ ਗੁਣ ਉਚਰੈ ਗੁਣ ਮਾਹੀਂ ਸਮਾਇਆ ਜਿਹੜੇ ਗੁਣ گاਊਗਾ ਕੋਣ ਨੂੰ ਚਰੂਗਾ ਗੁਣ ਕੇ ਸਮਝੂਗਾ ਉਹ ਵੀ ਸਮਝਾਊਗਾ ਤੇ ਤੂੰ ਜਿਹੜੇ ਹੋ ਗਿਆ ਜਿਵੇਂ ਇਸੇ ਰੰਗ ਤੇ ਜਾਊਗਾ ਉਹ ਸ਼ਰਤ ਪੂਰੀ ਕਰੀ ਜਾਂ ਜਿੰਨੇ ਮਰਜੀ ਸਮਝਾਂ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸੱਚੀ ਬਾਣੀ ਥਾਕੇ ਸੱਚ ਮੇਲ ਮਿਲਾਇਆ ਸੱਚੀ ਬਾਣੀ ਨਾਲ ਸਾਕਰ ਵੀ ਮੇਲ ਮਿਲਾਇਆ ਬਾਣੀ ਭੇਜੇ ਸੱਚੀ ਬਾਣੀ ਹੁੰਦੀ ਹੈ ਸੰਸਾਰ ਜਿਹਾ ਕਿ ਆਪਲੀ ਹੁੰਦਾ ਸੱਚ ਅਦ੍ਰਿਸ਼ ਰਹਿੰਦਾ ਬਾਣੀ ਪ੍ਰਗਟ ਹੋ ਜਾਂਦੀ ਹੈ ਬਾਣੀ ਦੇ ਰਾਹੀਂ ਹੀ ਸੱਚ ਪ੍ਰਗਟ ਹੁੰਦਾ ਹੈ ਇਹ ਸੱਚੀ ਬਾਣੀ ਸ਼ਬਦ ਗੁਰੂ ਹੈ ਜੀ ਸੱਚੀ ਬਾਣੀ ਹੈ ਗੁਰ ਬਾਣੀ ਉਹ ਸ਼ਬਦ ਗੁਰੂ ਹੈ ਉਹ ਉਹ ਜਿਹੜੀ ਹੋਰ ਉਹ ਸ਼ਬਦ ਗੁਰੂ ਹੈ ਉਹ ਤੁਰਕੀ ਬਾਣੀ ਹੈ ਇਹ ਸੱਚੀ ਬਾਣੀ ਹੈ ਸੱਚ ਹੈ ਸੱਚ ਸੱਚ ਮੇਲ ਮਿਲ ਆਇਆ ਸੱਚ ਮੇਲ ਮਿਲ ਆਇਆ ਇਹ ਮੇਲ ਮਿਲ ਆਇਆ ਗੁਰਵਾਨੀ ਮੇਲ ਮਿਲ ਆਇਆ 2000 ਦਿੱਤਰਾਂ ਨੂੰ ਦਾ ਠੀਕ ਹੈ ਜੀ ਸਭ ਕੁਝ ਆਪੇ ਆਪ ਹੈ ਆਪੇ ਦੇ ਵਡਿਆਈ ਆਪੇ ਆ ਤਾਂ ਸਭ ਕੁਝ ਆਪੇ ਵਡਿਆਈ ਦਿੰਦੇ ਕਿਉਂ ਕਿ ਆ ਜੀ ਸਭ ਕੁਝ ਆਪੇ ਆਪ ਹੈ ਸਭ ਕੁਝ ਆਪੇ ਆਪੇ ਆ ਤਾਂ ਸਭ ਕੁਝ ਪੈਨਤ ਇਹ ਨਹੀਂ ਜੇ ਕੋਠਿਆ ਤੋਂ ਨਾਂਸਾਰੇ ਇਹ ਪੈਰ ਕੋੜਾ ਮਾਰ ਕੇ ਆਪੇ ਆਪੇ ਸਭ ਹੋ ਗਏ ਪੈਰ ਕੋੜਾ ਮਾਰ ਲਿਆ ਉਹਦਾ ਉੱਜਾਰ ਕਰ ਲਿਆ ਠੀਕਰ ਲਿਆ ਫੇ ਠੀਕ ਹੋ ਗਏ ਆਪੇ ਆਪੇ ਹੀ ਸਭ ਕੁਝ ਕਿਉਂਕਿ ਨਹੀਂ ਜਾਣ ਸਕਣਾ ਫਿਰ ਐ ਨਹੀਂ ਹੋਣਾ ਆਪੇ ਦੇ ਵਡਿਆਈ ਆਪੇ ਦੇ ਵਡਿਆਈ ਵਡਿਆਈ ਵੀ ਆਪਣੇ ਆਪ ਨੂੰ ਆਪੇ ਦਿੰਦਾ ਸੱਚੇ ਮਾਰਗ ਚੱਲਦਾ ਉਸ ਤੋਂ ਜਾਣ ਆਪੇ ਕਰਦਾ ਤੋਂ ਬੰਦਾ ਦਾ ਇਹੀ ਹਨ ਸੱਚੇ ਮਾਰਗ ਤੇ ਤਾਂ ਇਹੀ ਚੱਲਦਾ ਨੂੰ ਵਧੀਆ ਹੀ ਆਪੇ ਹੁੰਦੀ ਹੈ ਫੀਕੇ ਜੀ ਇੱਥੇ 14ਵੀਂ ਪੌੜੀ ਸਮਾਪਤੀ ਹੈ ਜੀ ਇਸ ਪੰਕਤੀ ਦੀ ਜਿਹੜਾ ਕਾਫੀ ਉਹ ਵੀ ਵਾਹ ਵਾਹ ਸੱਚੇ ਪਾਤਸ਼ਾਹ ਸੱਚੀ ਨਾਈ ਨਾਲ ਮੇਲ ਖਾਂਦਾ ਜੀ ਹਾਂ ਜੀ